शलोक महला ਤੀਜਾ ਵਾਹ ਵਾ ਕਰਤੇ ਆ ਰੈਣ ਸੁਖ ਵਿਹਾਏ ਵਾਹ ਵਾ ਕਰਤੇ ਆ ਰੈਣ ਸੁਖ ਵਿਹਾਏ ਦਾ ਮਤਲਬ ਹੈ ਆ ਜਿਹੜੀ ਜ਼ਿੰਦਗੀ ਦੀ ਜ਼ਿੰਦਗੀ ਹੈ ਨਾ ਜੇ ਗੁਰਬਾਣੀ ਨਾਲ ਜੁੜੇ ਰਹੀਏ ਜੇ ਅੰਦਰੋਂ ਗੁਰਬਾਣੀ ਦਾ ਪੂਰਨ ਗਿਆਨ ਵਾਹ-ਵਾਹ ਕਰਤੇ ਸਦਾ ਅਨੰਦ ਹੋਵੇ ਮੇਰੀ ਮਾਏ ਸਦਾ ਅਨੰਦ ਹੋ ਜਾਂਦਾ ਸਦਾ ਲਈ ਅਨੰਦ ਹੋ ਜਾਂਦਾ ਮੇਰੀ ਮਾਏ ਮਾਏ ਕਿਨੂੰ ਸੋਏ ਜੀ ਮਾਏ ਮਾਤਰ ਨੂੰ ਕਮਾਤਾ ਠੀਕ ਹੈ ਜੀ ਵਾਹ-ਵਾਹ ਕਰਤੇ ਹਰ ਸਿਓ ਲਿਵ ਜੁੜ ਜਾਂਦਾ ਹਰ ਨਾਲ ਲੱਗ ਜਾਂਦੀ ਹਰ ਸਿਓ ਵਾਹ-ਵਾਹ ਕਰਮੀ ਬੋਲੇ ਬੋਲਾਏ ਬੁਲਾਇਆ ਬੋਲਦਾ ਵਾਹ-ਵਾਹ ਕਰਦਾ ਆਪ ਨਹੀਂ ਬੋਲ ਸਕਦਾ ਕੋਈ ਵੀ ਕਰਮੀ बड़े ਭਾਗਾ करके, बड़े ਭਾਗ ਉਹਨਾਂ ਨੂੰ ਬੁਲਾਵੇ ਦੇਰੂ ਪਰਮੇਸ਼ਰ ਫਿਰ ਬੋਲੇ ਕਰਮੀ ਕਰਮਾਂ ਵਾਲਾ ਬੁਲਾਇਆ ਬੋਲਦਾ ਹੈ ਹੋ ਜੀ करते ਵਾਹ ਕਰਤੇ ਆ ਸੋਭਾ ਪਾਈ ਵਾਹ ਵਾਹ ਕਰਕੇ ਸੋਭਾ ਪਾਈ ਵਾਹ ਵਾਹ ਕਰਤੇ ਨਾ ਸੋਭਾ ਤਾਂ ਕੋਣੀ ਹੋਈ ਹੈ ਸਾਰਿਆਂ ਦੀ ਨਾਨਕ ਵਾਹ ਵਾਹ ਸਤਿ ਰਜ਼ਾਏ ਵਾਹ ਵਾਹ ਕਨਾਰ ਉਦੀ ਰਜ਼ਾ ਚ ਰਹਿਣਾ ਚੱਲਣਾ ਇੱਕੋ ਗੱਲ ਹੈ ਨਾਨਕ ਵਾਹ ਵਾਹ ਸਤਿ ਰਜ਼ਾਏ ਇਹ ਦੀ ਰਜ਼ਾ ਚ ਚੱਲਣਾ ਪਰਮੇਸ਼ਰ ਦੀ ਰਜ਼ਾ ਵਿੱਚ ਚੱਲਣਾ ਇਹ ਵਾਹ ਵਾਹ ਕਰਦੇ ਨੇ ਠੀਕ ਹੈ ਜੀ ਹਾਂ ਜੀ ਮਹਲਾ ਵਾਹ ਵਾਹ ਬਾਣੀ ਸੱਚ ਹੈ ਗੁਰਮੁਖੀ ਲੱਦੀ ਭਾਲ ਵਾਹ ਵਾਹ ਸ਼ਬਦੇ ਉਚਰੈ ਵਾਹ ਵਾਹ ਹਿਰਦੇ ਨਾਲ ਆ ਜਿਹੜੀ ਵਾਹ ਵਾਹ ਵਡਿਆਈ ਕੀਤੀ ਐ ਹਾਂਜੀ ਗੁਰਬਾਣੀ ਵਾਹ ਵਾਹ ਵਾਣੀ ਗੁਰਬਾਣੀ ਸੱਚ ਹੈ ਇਹ ਸੱਚੀ ਬਾਣੀ ਹੈ ਇਹ ਦੁਨੀਆਂ ਦਾ ਸੱਚ ਹੈ ਗੁਰਮਕੀ ਲੱਦੀ ਬਾੜ ਪਰ ਨੂੰ ਸਭ ਜਾਣੀ ਅੱਗੇ ਵੀ ਇਹ ਬਾਣੀ ਸੱਚੀ ਹੈ ਗ੍ਰੰਥ ਬਹੁਤ ਲਿਖੇ ਹੋਏ ਨੇ ਇਹਦੇ ਮੁਕਾਬਲੇ ਦੀ ਬਾਣੀ ਕਿਤੇ ਨਹੀਂ ਜਿੱਤੇ ਕਿਤੇ ਹੋਊ ਉਹ ਵੀ ਪਾੜੀ ਹੋਈ ਹੈ ਕਬੀਰ ਨੇ ਜਿਹੜੀ ਪਾੜੀ ਸੀ ਗੁਰਮਕੀ ਲੱਦੀ ਬਾੜ ਬੋ ਵਾ ਸ਼ਬਦੇ ਉਚਰੇ ਵਾ ਵਾ ਹਿਰਦੇ ਨਾਲ ਬੋ ਵਾ ਸ਼ਬਦੇ ਉਚਰੇ ਵਾ ਜਦੋਂ ਵਡਿਆਈ ਦੇ ਸ਼ਬਦ ਉਹਦੀ ਉਸਤਤੀ ਦੇ ਸ਼ਬਦ ਪਰਮੇਸ਼ਰ ਦਾ ਗੁਣ ਗਾਇਨ ਦੇ ਗਾਇਲ ਸ਼ਬਦਾਂ ਵਿੱਚ ਉਚਾਰਨ ਕਰਦੇ ਨੇ ਬੋ ਵਾ ਹਿਰਦੇ ਲੜ ਹਿਰਦੇ ਨਾਲੇ ਕਰਦੇ ਨੇ ਅੰਦਰੋਂ ਵੀ ਕਰਦੇ ਨੇ ਬਾਹਰੋਂ ਵੀ ਕਰਦੇ ਉਹ ਨਾਲ ਨਹੀਂ ਕਰਦੇ ਅਸਲ 'ਚ ਉਹ ਉਹ ਨਾਲ ਤਾਂ ਸਦੂ ਧੀਰੇ ਨੇ ਉਹ ਨਾਲ ਤਾਂ ਪ੍ਰਗਟ ਹੁੰਦਾ ਕਰਦੇ ਤਾਂ ਹਿਰਦੇ 'ਚ ਨੇ ਉਹ ਬੋਲਣ ਵਾਲਾ ਹਿਰਦੇ ਚ ਬੋਲਦਾ ਮੂੰਹ ਨਹੀਂ ਤੇ ਸੁਣਾਈ ਦਿੰਦਾ ਜਿਵੇਂ ਦੇਖਣਾ ਸਪੀਕਰ ਕਿਤੇ ਹੁੰਦਾ ਸੁਣਨ ਵਾਲਾ ਬੋਲਣ ਵਾਲਾ ਕਿਤੇ ਹੁੰਦਾ ਇਹਦਾ ਮੂੰਹ ਥੱਲੇ ਜੁੜੀ ਹੋਈ ਹੈ ਬੋਲਣ ਥੱਲੇ ਬੈਠਾ ਹਾਂਜੀ ਵਾਹ ਵਾਹ ਕਰਤੇ ਭਾਲ ਜਿਹਨੇ ਵੀ ਪਾਇਆ ਵਾਹ ਵਾਹ ਕਰਤੇ ਪਾਇਆ ਗੁਰਬਾਣੀ ਦੇ ਨਾਲ ਜੁੜੇ ਹੀ ਪਾਇਆ ਲੋਭੋ ਕਰ ਸਿ ਨਹਿ ਪਾਇਆ ਸਹਿਜੇ ਗੁਰਮੁਖਿਆਈ ਵਸਤ ਦੇ ਵਿੱਚ ਗੁਰਮੁਖਾਂ ਨੇ ਪਾਇਆ ਬੋਲ ਟਿਕ ਜਾਂਦਾ ਸਹਿਜ ਹੋ ਜਾਂਦਾ ਬੋਲ ਟਕਾਓ ਹੋ ਜਾਂਦਾ ਸੇਵੜ ਹਰ ਹਰ ਹਿਰਦੇ ਸੰਭਾਲ ਉਹ ਹੋਰ ਵੀ ਬੜਪਾਕੀ ਨੇ ਜਿਨ੍ਹਾਂ ਨੇ ਹਰ ਹਰ ਹਿਰਦੇ ਵਿੱਚ ਸੁਭਾਲ ਲਿਆ ਜਿਨ੍ਹਾਂ ਨੇ ਇੰਦਾ ਬੜਾ ਸੂਤਰ ਗਿਆਨ ਦਾ ਸੂਤਰ ਹਿਰਦੇ ਚ ਸੋਭ ਲਿਆ ਉਹ ਹੋਰ ਵੀ ਬੜਪਾਕੀ ਨੇ ਇਹਦਾ ਸੁਭਦਾਰ ਹੈ ਇਡਾ ਵੱਡਾ ਗਿਆਨ ਦਾ ਅਠਾਸ ਬੁੱਧ ਨੇ ਹਿਰਦੇ 'ਚ ਸੁਭਾਗਿਆ ਸੁਭਾਲ ਲਿਆ ਉਹ ਵੱਡੇ ਪਗਾਂ ਮਨਾ ਅਤ ਲੋਭੀਆ ਰਾਤਾ ਮਾਇਆ ਮਨਸਾ ਮੋਹਣੀ ਦੇਦਿਸ ਫਿਰਤਾ ਇਹ ਮਨਾ ਅਤ ਲੋਭੀਆ ਇਹ ਮੇਰੇ ਲੋਭੇ ਰੱਤਾ ਤੂੰ ਤਾਂ ਦਿੱਤ ਲੋਭ ਦੇ ਵਿੱਚ ਰੰਗ ਚ ਰੰਗਿਆ ਲੈਨ ਤੂੰ ਤਾਂ ਲੋਭ ਨੂੰ ਘੇਰੇ ਘੜੀ ਚ ਤਿਆਗਦਾ ਹੀ ਨਹੀਂ ਮਾਇਆ ਬੁਲਸਾ ਵੋੜੀ ਲੈ ਦਿੱਸਨ ਰੱਤਾ ਨੇ ਤੇਰੀ ਦੀ ਮਗਰ ਦਸਾਂ ਤੇ ਜਾਣ ਚ ਇਹ ਕੀ ਕਰਦਾ ਇਹ ਕਿਹੜੇ ਰਾਹ ਪੈ ਗਿਆ ਅੱਗੇ ਨਾਉ ਜਾਤ ना जाई सी मनमुखी दुख खता अग्गे नौ जात ना जाई सी हां जी अग्गे नौ ਦਾ ਤੇਰਾ ਇੱਥੋਂ ਜਿਹੜਾ ਦੋ ਜਨ ਤੇਰਾ ਇਹ ਨਾ ਪੁੱਛਣਾ ਕਿ ਤੇਰਾ ਇੱਥੇ ਕੀ ਦੋ ਸੀ ਨਾ ਤੇਰੀ ਕੋਈ जात ਜਾਣੀ ਉੱਤੇ ਸਰੀਰ ਜਨ ਸਰੀਰ ਕਰਕੇ ਹੀ ਨਾ ਉਹ ਹੈ ਜਿਹੜਾ ਸਰੀਰ ਹੈ ਨਹੀਂ ਨਾ ਤਾਂ ਜਾਊ ਜੇ ਸਰੀਰ ਜਾਊ ਸਰੀਰ ਕਰਕੇ ਦੂਰ ਪਾਇਆਏ ਸਾਡੇ ਨਾ ਸਰੀਰ ਜਾਣਾ ਨਾ ਉਹ ਜਾਣਾ ਤੇਰਾ ਮਜਾਇ ਸੀ ਮਨ ਮੁਖ ਦੁੱਖ ਹੱਤਾ ਹੱਤਾ ਦੁੱਖਾਂ ਦੇ ਖਾ ਜਾਣਾ ਉੱਥੇ ਤੇ ਦੁੱਖੇ ਦੁੱਖ ਚ ਮੜ ਜਾਣਾ ਨਹੀਂ ਫਿਰਦਾ ਨਾ ਜਿਤਾਰ ਠੀਕ ਹੈ ਉੱਥੇ ਜਿਤਬਦੀ ਜਾਣੀ ਦੋਦੀ ਜਾਣਾ ਪੁੱਛਦੀ ਜਾਣਾ ਤੇਰਾ ਨਾਲ ਰਸਨਾ ਹਰ ਰਸ ਨਾ ਪੀਕਾ ਬੋਲਤਾ ਰਸਨਾ ਨਾ ਨਾ ਚੱਕ ਰਸਨਾ ਨੇ ਹਜ਼ਰ ਦਾ ਚੱਕਿਆ ਹੀ ਨਹੀਂ ਤੇਰੀ ਦਿੱਕਤ ਫੀਕਾ ਬੋਲਦਾ ਜੋ ਬੋਲਦਾ ਸਫਕਾ ਕੱਖ ਵੀ ਸਚਾਈ ਦੀ ਗੱਲ ਈ ਇੱਕ ਗੱਲ ਵੀ ਸੱਚੀ ਦੀ ਹੈ ਚਾਰ ਚਾਰ ਘਾਟੇ ਬੋਲਦਾ ਇਹ ਗੱਲ ਵੀ ਕਬਤੀ ਦੀ ਹੁੰਦੀ ਸਭ ਝੂਠ ਜਿਨ੍ਹਾਂ ਗੁਰਮੁਖੀ ਅੰਮ੍ਰਿਤ ਚੱਕਿਆ ਜਨ ਤ੍ਰਿਪਤਾਤਾ ਜਿਹੜਾ ਗੁਰਮੁਖਾ ਨੇ ਅੰਮ੍ਰਿਤ ਚੱਕ ਲਿਆ ਜਿਨ੍ਹਾਂ ਨੇ ਸੱਚ ਨੂੰ ਸੱਚੀ ਚਖਲੇ ਆ ਜੀ ਤੁਹਾਨੂੰ ਸੱਚ ਸੁਭਿ ਲੈ ਜੀ ਜਿਹਨਾਂ ਨੂੰ ਸੱਚ ਦੀ ਪ੍ਰਾਪਤੀ ਹੋ ਗਈ ਤੇ ਜਾਨਾ ਤ੍ਰਿਪਤਾਤਾ ਉਹ ਤਾਂ ਤ੍ਰਿਪਤ ਰਹਿੰਦੇ ਨੇ ਮਾਇਆ ਵੱਲ ਉਹ ਮਾਇਆ ਦੀ ਭੁੱਖ ਰਹੇਦੀ ਤੁਸੀਂ ਕਾਰਾਂ ਭਜਾਈ ਫਿਰਦੇ ਹੋ ਕਦੇ ਕਿਤੇ ਕਦੇ ਕਿਤੇ ਮਾਇਆ ਵਾਸਤੇ ਉਹ ਮਾਇਆ ਦੀ ਭੁੱਖ ਦੀ ਰਹਿੰਦੀ ਜਿਉਂ ਉਹਨੂੰ ਲੋੜ ਹੈ ਤਾਂ 10000 ਕੁੜੀ ਦਾ ਵਿਆਹ ਕਰਨਾ ਹੈ ਫਲਾਣਾ ਕਰਨਾ ਇਹਦਾ ਪਰ ਫਲ ਸਾਰੇ ਇਹ ਕਹਣਾ ਤੂੰ ਘਰ ਛੱਡਿਆ ਬਾਹਰ ਛੱਡਿਆ ਵਿਆਹ ਤਾਂ ਕਰਾਇਆ ਤੇਰੇ ਅੱਗੇ ਕੋਈ ਲੋੜ ਕਰੇ ਆਪਣੇ ਖਾਤਰ ਕੀਤਾ ਵਾਸਤੇ ਕੀ ਕੀਤਾ ਤੂੰ ਪੁੱਛੇ ਪੱਖੂ ਦੀ ਆ ਗਈ ਕਰਦਾ ਫਿਰ ਤਾਂ ਪਰਪੰਚ ਵਿਆਹ ਕਾਲੂ ਕਰਦੇ ਨੇ ਕੁੜੀਆਂ ਦੇ ਉਹ ਤਾਂ ਆਏ ਆ ਆਪਣਾ ਵੀ ਢੇਰੇ ਢੂਰੇ ਬਣਾ ਲੈਣਗੇ ਸਾਰਿਆਂ ਨੂੰ ਲੈ ਲੈਣ ਉਹ ਤਾਂ ਪਰਪੰਚ ਹੈ ਇੱਕ